ਐੜੇ ਅੱਖਰ ਤੋਂ ਭਗਤ ਕਬੀਰ ਜੀ ਵੱਲੋਂ ਉਸ ਬਾਣੀ ਬਾਵਨਾ ਖਰੀਚ ਕੋਈ ਪੌੜੀ ਨੀ ਹੈ। ਉਹ ਨਾਨਕ ਸਾਹਿਬ ਨੇ ਐੜੇ ਅੱਖਰ ਤੋਂ ਵਿਦੇਸ਼ ਦਿੱਤਾ ਹੈ। ਔਰ ਅਸਰਚੋ ਬਿਲਕੁਲ ਅੰਤਮ ਪੌੜੀ ਹੈ। ਹਾਂਜੀ। ਪੌੜੀ ਹੈਗੀ ਹੈ ਪੱਤੀ ਲਿਖੀ। ਆਇੜੇ ਆਪ ਕਰੇ ਜਿਨ ਛੋਡੀ ਜੋ ਕਿਛ ਕਰਨਾ ਸੋ ਕਰ ਰਹਾ ਕਰੇ ਕਰਾਇ ਸਭ ਕਿਛ ਜਾਣੈ ਨਾਨਕ ਸਾਇਰ ਏਵ ਕਹਿਆ ਅੰਦਰੋਂ ਲਾਈਟ ਜੀ ਨੇ ਜੋਤ ਛੱਡੀ ਆ ਮਾਇਆ ਚ ਰਣ ਵਾਸਤੇ ਉਹੀ ਸਭ ਕੁਛ ਕਰਦਾ ਕਿੱਥੇ ਤਾਂ ਉਹੀ ਐ ਆਪ ਕਰੇ ਉਹ ਕਰਨ ਵਾਲਾ ਉਹੀ ਐ ਜਿਨੇ ਛੋਡੀ ਜਿਨੇ ਆਪਣੀ ਜੋਤ ਬਾਹਰ ਛੱਡੀ ਆ ਮਾਇਆ ਚ ਉਹੀ ਪਿੱਛੇ ਕੰਟਰੋਲ ਕਰ ਰਿਹਾ ਜਿਨੇ ਛੋਡੀ ਹਾਂਜੀ ਜੋ ਕੁਛ ਕਰਨਾ ਸੋ ਕਰ ਰਹਾ ਆ ਉਹ ਕਰਦਾ ਤਾਂ ਉਹੀ ਆ ਜੋ ਕੁਛ ਕਰਨਾ ਆਪਣੀ ਮਰਜ਼ੀ ਨਾਲ ਕਰ ਰਹਾ ਉਹਦੇ ਹੁਕਮ ਤੇ ਹੀ ਚਲਦੀ ਆ ਇਹ ਹਾਂਜੀ ਕਰੇ ਕਰੇ ਕਰਾਏ ਉਹ ਕਰਦਾ ਤਾਂ ਉਹਨੂੰ ਕਹਿੰਦੇ ਆ ਕਰਾਉਂਦਾ ਉਹ ਹਿੱਤੇ ਹੈ ਸਰੀਰ ਤੇ ਕਰਾਉਂਦਾ ਕਰਾਉਂਦਾ ਤਾਂ ਸਰੀਰ ਤੇ ਆ ਪਰ ਕਰਾਉਂਦਾ ਉਹ ਹੈ ਇਸ ਕਰਕੇ ਉਹੀ ਕਰਦਾ ਜੋ ਤੇ ਕਰਦੀ ਹੈ ਜੋ ਕੁਝ ਕਰਦੀ ਹੈ ਸਰੀਰ ਕੁਝ ਨਹੀਂ ਕਰਦਾ ਜਨਤਾ ਕੇ ਬਸ ਕੁਝ ਨਹੀਂ ਸਰੀਰ ਤਾਂ ਜੰਤਾ ਹੈ ਮੰਤਰੀ ਕੁਝ ਕਰ ਸਕਦਾ ਕਰਨ ਵਾਲਾ ਉਹੀ ਹੈ ਪਿੱਛੇ ਕਰਨ ਵਾਲੀ ਜੋਤ ਹੈ ਉਹ ਕਰਾਉਂਦਾ ਤਾਂ ਕਰਦਾ ਹੈ ਪਾਪ ਤਾਂ ਨਹੀਂ ਹੈ ਕਰਾਉਣ ਵਾਲਾ ਕੋਈ ਹੋਰ ਹੈ ਉਹ ਵੀ ਨਹੀਂ ਪਰ ਅਸੀਂ ਕਰਾਉਣ ਵਾਲਾ ਛੱਡਦਾ ਕਰਨ ਵਾਲਾ ਖੜੇ ਕਰੇ ਕਰਾਇ ਸਭ ਕਿਸ ਜਾਣੈ ਨਾਨਕ ਸਾਇਰ ਈਵ ਕਹਿਆ ਕਰੇ ਕਰਾਇ ਸਭ ਜਾਣੈ ਜਾਣਦਾ ਵੀ ਹੈ ਸਭ ਕੁਝ ਕਿ ਮੈਂ ਠੀਕ ਕਰਦਾ ਜਾਂ ਗਲਤ ਕਰਦਾ ਇਹ ਵੀ ਜਾਣਦਾ ਹੈ ਜਾਂ ਕਰਦਾ ਜੇ ਠੀਕ ਕਰਦਾ ਜਾਂ ਗਲਤ ਕਰਦਾ ਆਪਣੀ ਮਰਜ਼ੀ ਜਾਣ ਕੇ ਹੀ ਸਭ ਕਰਦਾ ਨਾਨਕ ਸਾਇਰ ਈਵ ਕਹਿਆ ਨਾਨਕ ਜਾਣਦਾ ਇਹ ਗਲਤ ਥੀ ਹੈ ਹਾਂਜੀ ਠੀਕ ਹੈ ਇਹ ਵੀ ਨਾਨਕ ਸ਼ਾਇਰ ਨੇ ਇਹ ਗੱਲ ਦੱਸੀ ਹੈ ਪਰ ਇਹ ਪਿੱਛੋਂ ਕੋਈ ਗੱਲ ਘਾਰਿਆ ਨਾ ਤਾਂ ਹੈ ਜੀ ਕੌਣ ਵਾਲਾ ਤਾਂ ਪਰਮੇਸ਼ਰ ਹੈ ਕੌਣ ਵਾਲਾ ਹੁਸੈਨ ਨਾ ਕੀ ਕਰਨ ਠੀਕ ਹੈ ਜੀ ਹੁਣ ਪਾਣੀ ਮੇ ਪਾਸ਼ਾ ਦਾ ਉਪਦੇਸ਼ ਹੈ ਜੀ ਆਈ ਡੇ ਅੱਖਰ ਤੋਂ ਹਾਂ ਜੀ ਇਹ ਵੀ ਲਗਭਗ ਅੰਤਲੀ ਪੌੜੀ ਤੇ ਆਉਂਦਾ ਹੈ ਪੌੜੀ ਅੱਖਰ ਮੈਂ ਤ੍ਰਿ ਪਵਨ ਪ੍ਰਭ ਧਾਰੇ ਅੱਖਰ ਕਰ ਕਰ ਵੇਦ ਵਿਚਾਰੇ ਅੱਖਰ ਸ਼ਾਸਤਰ ਸਿਮਰਿਤ ਪੁਰਾਨਾ ਅੱਖਰ ਨਾਦ ਕਥਨ ਵਿਖਿਆਨਾ ਜਿਹੜੇ ਸਾਡੇ ਸਾਹਮਣੇ ਨੇ ਇਹ ਅੱਖਰ ਨੇ ਕਿੰਨਾ ਪਵਨਾ ਦੇ ਵਿੱਚ ਜੋ ਵੀ ਕੁਛ ਹੈ ਦੀਨ ਅੱਖਰ ਹੈ ਸੋਈ ਜੋ ਦੀਨ ਉਹ ਅੱਖਰ ਦੇ ਸਭ ਅੱਖਰ ਵੀ ਦੀਨ ਨੇ ਵਾਲੀ ਚੀਜ਼ ਅੱਖਰ ਨੇ ਕਿੰਨੇ ਪਵਨਾ ਅੱਖਰ ਨੇ ਕਿੰਨੇ ਪਵਨਾ ਦਾ ਜਿਹੜਾ ਗਿਆਨ ਹੈ ਉਹ ਕਹਿੰਦਾ 52 ਅੱਖਰ ਲੋਕ ਤਰ 52 ਅੱਖਰ ਨੇ ਤਿੰਨ ਲੋਕ ਦਾ ਗਿਆਨ ਹੈ ਤਿੰਨ ਲੋਕ ਨੂੰ ਤਿੰਨ ਭਵਨ ਕਹਿੰਦਾ ਇੱਥੇ ਕਿੰਨਾ ਲੋਕਾਂ ਦਾ ਗਿਆਨ ਹੈ ਜਿਹੜਾ ਅੱਖਰ ਨੇ ਅੱਖਰ ਜੋ ਖਾਨੂੰ ਦੀਦਾ ਅੱਖਰ ਜਿਹਨੇ ਤੇ ਮਾਇਆ ਹੈ ਤੇ ਪ੍ਰਭ ਧਾਰੇ ਤੋਂ ਕੀ ਮਤਲਬ ਬਣਦਾ ਜੀ ਯਾਨੀ ਜੋ ਵੀ ਸਰੀਰ ਧਾਰਨ ਕੀਤੇ ਨੇ ਜੋ ਵੀ ਮਾਇਆ ਦੇ ਵਿੱਚ ਧਾਰਨ ਕੀਤੇ ਨੇ ਗਿਆਨ ਧਾਰਨ ਕੀਤਾ ਜੋ ਵੀ ਕੁਝ ਹੈ ਅੱਖਰ ਨੇ ਸਭ ਦੇਸ਼ਮਾਨ ਅਖਰ ਹੈ ਜੇ ਤਾਂ ਜੋ ਦਸ਼ਮਾਨ ਹੈ ਉਹੀ ਆ ਰਹੀ ਹੈ ਕਿ ਪ੍ਰਭ ਜਿਹੜਾ ਹੈਗਾ ਉਹ ਮਾਇਆ 'ਚ ਜੁੜਿਆ ਹੋਇਆ ਹੈ ਜੀ ਖੁਦਾ ਮਾਇਆ ਦੇ ਦੇ ਹੁੰਦਾ ਮਾਇਆ ਤੋਂ ਪਰੇ ਆ ਮਾਇਆ ਜੇ ਉਹ ਆਦਮੀ ਕਿਤੇ ਆਨੋਦਾ ਕਿਸੇ ਚੀਜ਼ 'ਚ ਆਪ ਫਿਰ ਵੀ ਲਖੜਾ ਹੈ ਅੱਖਰ ਕਰ ਕਰ ਕੇ ਅੱਖਰ ਲਿਖ ਲੈ ਕੇ ਗਿਆਨ ਵਿਚਾਰ ਹੁੰਦੀ ਹੈ ਅੱਖਰ ਲਿਖੇ ਜੇ ਪਹਿਲਾਂ ਫਿਰ ਅੱਖਰਾਂ ਦੇ ਵਿਚਾਰ ਕਰਦੇ ਆਂ ਫਿਰ ਉਤੋਂ ਗਿਆਨ ਵੇਦ ਕੀ ਕਿਸੇ ਨੇ ਕਿਹਾ ਸੀ ਜੋ ਕਹਿਣਾ ਚਾਹੁੰਦਾ ਤਾਂ ਖਰੀ ਰੂਪ ਦੇ ਗਿਆ ਉਹ ਗਿਆਨ ਜੇ ਤੁਸੀਂ ਉਹ ਫਿਰ ਵਿਚਾਰ ਕਰੋਗੇ ਉਹੀ ਗਿਆਨ ਤੁਹਾਨੂੰ ਫਿਰ ਮਿਲ ਜੂਗਾ ਬੋਲਣ ਵਾਲਾ ਤਾਂ ਉਹਨੇ ਹੈ ਦੀ ਅੱਖਰ ਹੈਗੇ ਨੇ ਠੀਕ ਹੈ ਜੀ ਗਿਆਨ ਮਿਲੂ ਜਿਹੜਾ ਉਹ ਦੇਣਾ ਚਾਹੁੰਦਾ ਸੀ ਤੁਹਾਨੂੰ ਹਾਂ ਅੱਖਰ ਸ਼ਾਸਤਰ ਸਿਮਰਤ ਪੁਰਾਨਾ ਅੱਖਰ ਨਾਦ ਕਥਨ ਵਿਖਿਆਨਾ ਨਾਦ ਦਾ ਜਿਹੜਾ ਕਥਨ ਹੈ ਆ ਗੁਰਬਾਣੀ ਹੈ ਪੋਥੀ ਸਾਹਿਬ ਹੈ ਉਹ ਵਿਖਿਆਨ ਹੈ ਜਿਹੜਾ ਨਾਦ ਦਾ ਉਹ ਵੀ ਅੱਖਰ ਦੇ ਕਾਹ ਸਿਮਰਤ ਪੁਰਾਣ ਨੇ ਉਹ ਵੀ ਅੱਖਰ ਦੇ ਹੁਣ ਅੱਖਰਾਂ ਨੂੰ ਅਸੀਂ ਗ੍ਰੰਥਕਤਾ ਕਰੋ ਠੀਕ ਅਸੀਂ ਕਹਿੰਦਾ ਗੁਰੂ ਸ਼ਬਦ ਜਿਹੜਾ ਵਰਤਿਆ ਉਹ ਪ੍ਰੇਖਾ ਪਾਉ ਗੱਲ ਹੋਣੀ ਕਿਤੇ ਮੇਖਾ ਬਣ ਲਿਆ ਗੁਰੂ ਵਿਅਕਤੀ ਹੁੰਦਾ ਜੇ ਤਾਂ ਹਣ ਸਰੀਰ ਦਾ ਰੂਪ ਲਈਏ ਸਾਵੇਂ ਜੋ ਸਰੀਰ ਜਿਹੜਾ ਪਾਣੀ ਨੂੰ ਪਿਆਸ ਲੱਗਦੀ ਹੈ ਦੇ ਦੀਏ ਨੂੰ ਬਰਾਬਰੀ ਦੇ ਦੀਏ ਤਾਂ ਵੀ ਗੱਲ ਠੀਕ ਹੋ ਸੀ ਇਹ ਠੀਕ ਅਸੀਂ ਸੈਪ ਲੈ ਲਿਆ ਉਦੋਂ ਹੀ ਗੱਲ ਜਿਨ੍ਹਾਂ ਨੇ ਲਿਆ ਸੀ ਸੈਪ ਕਹਿੰਦਾ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਜਾਣ ਬੁੱਝ ਕੇ ਸੈਪ ਲਵਾ ਕੇ ਸਾਨੂੰ ਵਾਹਾਂ ਹਾਈਂ ਸੜਦਾ। ਬਾਣੀ ਜੇ ਅਸੀਂ ਅਗਲੇ ਅੱਗੇ ਜੀ ਤੁਰਨਾ ਅਜਿਖੀ ਸੀ ਬੜੀ ਖਤਰਨਾਕ ਜਿਹਦੇ ਪੇ। ਉਹ ਡੇੜਾ ਨਾ ਸੀ ਕੋਤੀ ਪਰਮੇਸ਼ਰ ਦਾ ਧਾਨ। ਧਾਨ ਹੈ ਪਰਮੇਸ਼ਰ ਦੀ ਹੈ ਕੋਤੀ। ਕਹਿੰਦਾ ਉਹ ਬਣਾਉਂਦਾ ਸੀ ਪਰਮੇਸ਼ਰ ਅੱਖਰ ਬਣਾਉਣਗੇ ਸਾਨੂੰ। ਜੋ ਅੱਖਰ ਹੈ ਨਿਕੇ ਉਹ ਬੋਲਣਾ ਪਊਗਾ। ਠੀਕ ਹੈ ਜੀ। ਇੱਥੇ ਤੋਂ ਬੜਾ ਸਪਸ਼ਟ ਹੈ ਜੀ ਅੱਖਰ ਨਾਦ ਕਥਨ ਬਖਿਆ ਨਾ। ਜਿਹੜਾ ਹੈ ਉਹ ਸ਼ਬਦ ਗੁਰੂ ਹੈ ਜੀ। ਕੋਈ ਸ਼ਬਦ ਗੁਰੂ ਦਾ ਨਾਮ ਉਹਦਾ ਵਿਖਿਆਨ ਅੱਖਰਾਂ ਗੁਰੂ ਤਾਂ ਉਹ ਸੀਗਾ ਇਹਨੂੰ ਗੁਰੂ ਅਸੀਂ ਕਹਤਾ ਵਿਖਿਆਨ ਸ਼ਬਦ ਗੁਰੂ ਦਾ ਰਾਹ ਰੋਕਣ ਦਾਸਤੇ ਕਿਹਾ ਨਾ ਗੁਰੂ ਹੈ ਸ਼ਬਦ ਗੁਰੂ ਇਹਨੂੰ ਕਹਤਾ ਉਹਦਾ ਰਾਹ ਰੋਕਦਾ ਵੀ ਉੱਥੇ ਗਾਹ ਨਾ ਪਹੁੰਚਣ ਇੱਥੇ ਹੀ ਬਿਨਾ ਗੰਨਾ ਤੇ ਸੁਣਨ ਵਾਲੀ ਬਾਣੀ ਦਾ ਖਿਆਲੇ ਭੁੱਲ ਜਾਣੇ ਹੈ ਹਲਤੇ ਸੀ ਨਾ ਗਾਹ ਸੋਣ ਨਾਇਰ ਨੂੰ ਪਤਾ ਲੱਗੇ ਨਾ ਗਾਹ ਤੋਂ ਉਹ ਤਾਂ ਰਾ ਰੋਕਣ ਦਾ ਸੇ ਕੀਤਾ ਸਭ ਕੁਝ ਹੈ ਬਹੁਤ ਬੜੀ ਸ਼ਰਾਰਤ ਹੈ ਕੀਤੀ ਹੋਈ ਬਹੁਤ ਬੜਾ ਧੋਖਾ ਵੀ ਕੀਤਾ ਹੈ ਇਹ ਸੰਗਤ ਨਾਲ ਧੋਖਾ ਕਰੀ ਜਾਂਦੇ ਵਿਦਵਾਨ ਤਾਂ ਯਾਦ ਹੀ ਨਹੀਂ ਹੁੰਦਾ ਗਾਹ ਵਿਦਵਾਨ ਦਾ ਕਹਿੰਦੇ ਨੇ ਸਾਡੇ ਕਬਜ਼ੇ ਚ ਰਹੇ ਸੰਗਤ ਕਾਬਲੀਅਤ ਹੁੰਦੀ ਨਹੀਂ ਵਿਦਵਾਨਾਂ ਚ ਹੁੰਦੀ ਹੁੰਦੀ ਨਹੀਂ ਉਹ ਤਾਂ ਰੌਲਾ ਪਾਉਂਦੇ ਨੇ ਵੀ ਜੇ ਗਾਹ ਦੀ ਗੱਲ ਚੱਲ ਪਈ ਸਾਡਾ ਕਬਜ਼ਾ ਦੀ ਰਹਿਣਾ ਸਾਡੀ ਗੱਲ ਸੁਣਣੀ ਨਹੀਂ ਸਾਰੇ ਲੋਕ ਉਹਨਾਂ ਕੋ ਗਾਂ ਦੀ ਗੱਲੇ ਨਹੀਂ ਹੁੰਦੀ ਨਾ ਉਹਨਾਂ ਦੀ ਖੁੱਦੀ ਇਹ ਜੀ ਗੱਲ ਸਮਝਣ ਵਾਲੀ ਹੁੰਦੀ ਹਾਂਜੀ ਅਖਰ ਮੁਕਤੀ ਜੁਗਤੀ ਪਹਿ ਪਰਮਾ ਅਖਰ ਕਰਮ ਕਿਰਤ ਸੁਚ ਧਰਮਾ ਆ ਜਿਹੜੀ ਮੁਕਤੀ ਲਿਖਦੇ ਆ ਜੁਗਤੀ ਲਿਖਦੇ ਆ ਸੁਚ ਲਿਖਦੇ ਆ ਧਰਮ ਲਿਖਦੇ ਆ ਨੇ ਸਾਰੇ ਕੀ ਮੁਕਤੀ ਲਿਖੀ ਹੋਈ ਮੁਕਤੀ ਹੈ ਹੋ ਕਿਆ ਧਰਮ ਜੇ ਅਖਰ ਲਿਖਦਾ ਉਹ ਧਰਮ ਬਣ ਗਿਆ ਸਾਰਮ ਕੀ ਹੈ ਉਹਦਾ ਵਿਗਿਆਨ ਹੈ ਮੁਕਤੀ ਕੀ ਹੈ ਕਹਾਂ ਸਾਰਾ ਵਿਗਿਆਨ ਹੈ ਕੁਰਬਾਨੀ ਚ ਉਹ ਛੱਡ ਦਿੱਤਾ ਹੁਣ ਮੁਕਤੀ ਅੱਖ ਲੈ ਕੇ ਜੇ ਵਾਲ ਮੁਕਤੀ ਹੋਵੇ ਮੁਕਤੀ ਮੁਕਤੀ ਲੈ ਕੇ ਤਬੀਦ ਬਣਾ ਕੇ ਗੱਲ ਕਰਿਆ ਵੱਲ ਮੁਕਤੀ ਹੋਵੇ ਮੁਕਤੀ ਮਿਲ ਗਈ ਪਰ ਇਦਾਂ ਹੀ ਕਰਦੇ ਹੁੰਦੇ ਨੇ ਜਿਹੜੇ ਨੇ ਉਹ ਜੜ ਜਿਹੜੇ ਜਾਂ ਉਹ ਜੜਾ ਵੜਦੇ ਨੇ ਉਹ ਜੜ ਹੁੰਦੇ ਨੇ ਜਿਆਦਾ ਉਹ ਜੜਾ ਵੜਦੇ ਨੇ ਉਹ ਜੜ ਆਪਣੀ ਉਹ ਫੇ ਚਲਾਉਂਦੇ ਨੇ ਬਸ ਠੀਕ ਹੈ ਜੀ ਠੀਕ ਉਹ ਜੜ ਜਿਆਦਾ ਨੇ ਉਹ ਦਾ ਧਰਮ ਨਾਤਾ ਹੈ। ਜੁਗਿਆਨੀਆਂ ਦੇ ਖੰਡਰ ਸਿੱਖੀ ਬਾਣੋਂ ਨਿੱਕੀ ਜਿਹੜੀ ਗੱਲ ਸੀ ਉਹ ਝੱਡਾਂ ਨਹੀਂ ਬਣਦੀ। ਉਹ ਝੱਡ ਜਿਹੜੇ ਦੇਖਿਓ। ਉਹ ਝੱਡ ਬਣੇ ਦਾ ਪ੍ਰਚਾਰ ਕਰਦਾ। ਹਾਂਜੀ। ਕਿਰਤ ਸੋਚ ਧਰਮ ਇਹ ਅਖਰ ਇਹਨੇ ਸਾਰੇ ਜਿਹੜੇ ਗੁਰਬਾਣੀ ਚ ਲਿਖੇ ਨੇ। ਇਹ ਅਖਰੀ ਰੂਪ ਆ। ਸ਼ਬਦ ਗੁਰੂ ਦਾ, ਤੁੜਕੀ ਬਾਣੀ ਦਾ ਅਖਰੀ ਰੂਪ ਜੋ ਉਹਦੇ ਵਿੱਚ ਮਿਲਿਆ ਸੀ ਉਹ ਉਹਦਾ ਗਿਆਨ ਹੈ ਉਹ ਫਿਰ ਵੀ ਨਹੀਂ ਹੈ ਉਹਦੇ ਨਾਲ ਜੋੜਨ ਵਾਸਤੇ ਕਿਵੇਂ ਜੋੜਨਾ ਕੀ ਹੁੰਦਾ ਕਿੱਥੇ ਹੁੰਦਾ ਕਿਹਾ ਜਾਂਦਾ ਉਹਦੇ ਨਾਲ ਜੋੜ ਤੱਕਦਾ ਇਹਦੇ ਵਿੱਚ ਗਿਆਨ ਹੋਗਾ ਨੇ ਉੱਥੇ ਦਾ ਕੱਪੜੀ ਵਸਤੂ ਨੂੰ ਲੈ ਕੇ ਗਏ ਨੇ ਜਿਹੜਾ ਉਹਨਾਂ ਨੇ ਉਹ ਵਿਧੀ ਲਿਖੀ ਹੈ ਇਹਦੇ ਵਿੱਚ ਇਸ ਵਿਧੀ ਨਾਲ ਅਸੀਂ ਉੱਥੇ ਪਹੁੰਚਿਆ ਇਸ ਅਵਸਥਾ ਨੂੰ ਤੁਸੀਂ ਉਹ ਵਿਧੀ ਅਪਣਾ ਲਿਓ ਐ ਪਹੁੰਚ ਜਾਓਗੇ ਹਾਂਜੀ दृष्टमान अक्षर है जीता मानक पार ब्रह्म निर्लेपा अक्षर का सारे देशमान ने दीने तंग गुरु असी पढ़दे नाल कहने जी दा दर्शन करना खनुली दा फिर इसे दा रमाला जाके उन दर्शन भी कराण लागए इसे दा ਵੇ ਇਹਨਾਂ ਨੂੰ ਗਿਆਨ ਦਾ ਪਤਾ ਹੀ ਨਾ ਲੱਗ ਜਵੇ ਬਹੁਤ ਬੜਾ ਫਰੌਡ ਕਰਦੇ ਹੀ ਪੈਸੂ ਬਣਾ ਲਏ ਨੇ ਲੋਕਾਂ ਨੇ ਠੀਕ ਹੈ ਜੀ ਕਹਿਣ ਦਾ ਭਾਵ ਹੈ ਕਿ ਇਹ ਅੱਖਰ ਤਾਂ ਦਿਖਣ ਵਾਲਾ ਹੈਗਾ ਪਰ ਜਿਹੜਾ ਪਰਮ है ਜਿੱਥੇ ਤੱਕ ਅਸੀਂ ਪਹੁੰਚਣਾ ਉਹ ਦਿਖਦਾ ਵੀ ਨਹੀਂ ਤੇ ਮਾਇਆ ਤਾਂ ਨਿਰਲੇਪੀ ਹੈ ਆਹ ਇਹ ਨਹੀਂ ਬੁੱਝੇ ਲੂਗਾ ਬਲਕਿ ਸਮਝਣ ਵਾਲੀ ਗੱਲ ਨਹੀਂ ਗੱਲ ਬੁੱਝਣ ਵਾਲੀ ਹੈ ਇੰਨੀ ਬੁੱਧੀ ਨੂੰ ਸਮਝ ਹੋ ਜੂ ਬੁੱਧੀ ਕੋਲ ਕਿ ਬੁੱਝੇ ਲੂਗੀ ਗੱਲ ਠੀਕ ਹੈ ਜੀ ਇਹ ਉਪਦੇਸ਼ ਚਰੰਜਵੀ ਪੌੜੀ ਚ ਆਪਾਂ ਨੂੰ ਪੰਜਵੇਂ ਬਾਦਸ਼ਾਹ ਨੇ ਦ੍ਰਿੜ ਕਰਾਇਆ ਜੀ ਇੱਥੇ ਐਡੇ ਅੱਖਰ ਤੋਂ ਜੋ ਉਪਦੇਸ਼ ਆਪਾਂ ਨੂੰ ਦਿੱਤਾ ਹੈ ਉਹਦੀ ਉਹਦੀ ਸਮਾਪਤੀ ਹੈ ਜੀ G